ਕਲ ਸਮੁੰਦਰ ਪਏ ਰੂਪ ਪ੍ਰਗਟ ਹਰ ਨਾਮ ਉਦਾਹਰਣ ਹਾਂ ਕਲ ਸਮੁੰਦਰ ਪਏ ਰੂਪ ਪ੍ਰਗਟ ਹਰ ਨਾਮ ਉਦਾਹਰਣ ਹਾਂਜੀ ਪਲ ਕੋਰਸਬੁੱਧਰ ਸੀ ਨਾ ਹਾਂਜੀ ਕਲ ਯੁਗ ਦਾ ਹਾਂਜੀ ਕਲਪੜਾ ਦਾ ਕੋਰਸਬੁੱਧਰ ਦੇ ਵਿੱਚ ਜਿਹੜੇ ਡਿੱਗੇ ਹੋਏ ਸੀ ਉਹ ਪ੍ਰਗਟ ਹੋ ਗਏ ਹਾਂ ਨਾਮ ਦੇ ਉਦਾਹਰਣ ਕਰਕੇ ਹਾਂ ਨਾਮ ਨੇ ਬਾਹਰ ਕੱਢ ਲਏ ਉਥੋਂ ਹਾਂ ਕਲਪਨਾ ਚ ਬਾਹਰ ਕੱਢ ਲੈ ਬਾਹਰ ਕੱਢ ਕੇ ਜੇ ਦਿਖੇ ਬਾਹਰ ਸੂਦਰ ਕਿਉਂਦਾ ਆਪੇ ਪਰ ਜਿਹੜੇ ਡੁੱਬਿਆ ਹੋਇਆ ਉਹ ਨਾ ਸੂਦਰ ਚ ਬਾਹਰ ਕੱਢਦਾ ਨਹੀਂ ਜਿਹੋ ਹੀ ਤੂਗੀ ਬਾਹਰ ਨਿਕਲੇ ਜਿਹੜੇ ਉਹ ਪ੍ਰਗਟ ਹੋ ਗਏ ਉਹਨਾਂ ਨੇ ਆਪਣੇ ਆਪ ਨੂੰ ਪ੍ਰਗਟ ਕਰਤਾ ਭਗਤ ਸਾਰੇ ਪ੍ਰਗਟੇ ਠੀਕ ਪਤਾ ਲੱਗਦਾ ਕਲਪੌਰ ਸੂਦਰ ਚ ਬਾਹਰ ਨਿਕਲੇ ਹਾਂ ਕੁਰਬਾਨੀ ਰਜੀ ਹੈ ਹਾਂਜੀ ਸਾਫੇ ਜਾ ਰਹਾ ਵੀ ਆਨਕਲੇ ਨੇ ਵੀ ਪਰਗਲ ਨੇ ਹੂੰ ਠੀਕ ਹੈ ਜੀ ਬਸਾ ਸੰਤ ਜਿਹਦੇ ਹਿਰਦੇ ਵਿੱਚ ਸੰਤ ਬਾਚ ਜਵੇ ਸੰਤ ਸ਼ੋਤੀ ਬਾਚ ਜਵੇ ਯਾਨੀ ਸੰਤ ਜਿਹੜਾ ਹਮੇਸ਼ਾ ਹਰ ਕਾਲ ਸੰਤ ਉਹ ਜਿਹੜਾ ਸ਼ਾਂਤ ਹੋ ਕੇ ਹਿਰਦੇ ਚ ਵਸ ਜਵੇ ਐ ਕਹਿ ਲੋ ਬਹੁਣੋ ਸ਼ਾਂਤ ਤਾਂ ਨੂੰ ਸੰਤਰੀ ਹੈ ਹਾਂਜੀ ਜਦੋਂ ਅਜਿਹੇ ਭਟਕਦਾ ਮਾਇਆ ਚ ਸ਼ਾਂਤ ਹੈ ਕੇ ਰੂਪ ਦੇ ਨਾਲ ਹਿਰਦੇ ਚ ਬੈਜ ਬੈ ਟੱਕੇ ਹੂੰ ਦੁੱਖ ਤੇ ਸਾਰੇ ਦੂਰ ਹੋ ਜਾਂਦੇ ਉਹਦੇ ਦੁੱਖ ਦਰਦ ਦਰ ਦੇ ਸੁਖ ਸਾਗਰ ਚ ਭਵ ਸਾਗਰ ਚ ਭਵ ਸਾਗਰ ਜਿਹੜਾ ਸੁਖ ਸਾਗਰ ਚ ਲਿਆ ਗਿਆ ਹਮ ਕਿਤੇ ਸਤ ਹੈ ਸ਼ੁੱਧੀ ਹੈ ਉਹ ਤੇ ਹੀ ਨਹੀਂ ਕੋਈ ਜਿਹੜੇ ਕੱਪੜੇ ਬਾਕੇ ਬਾਣਾ ਪਾਕੇ ਸਤ ਬਣੇ ਫਿਰਦੇ ਨੇ ਭਵ ਸਾਗਰ ਚ ਅਸਲ ਚ ਅਸਲ ਤੇ ਆ ਸੁਖ ਸਾਗਰ ਦੇ ਵਿੱਚ ਰਹਿਣ ਵਾਲੇ ਮਨ ਕਰਕੇ ਸੁਖ ਸਾਗਰ ਜਿਹੜੇ ਰਹਿਣ ਵਾਲੇ ਸੰਤ ਹੁੰਦੇ ਨੇ। ਸ਼ਰੀਰ ਤੇ ਕੱਪੜਿਆਂ ਦਾ ਭੇਦ ਦਾ ਕੋਈ ਫਰਕ ਨਹੀਂ ਰਹ ਜਾਂਦਾ ਉੱਥੇ। ਹੂੰ ਹੂੰ। ਇਹ ਬਹੁਤ ਝਟਪਸਤਾਰਾ ਹਾਂ ਸੰਤ। ਠੀਕ ਹੈ ਜੀ। ਕੋਈ ਸੰਬੰਧ ਨਹੀਂ। ਹੂੰ ਹੂੰ। ਪਸੰ ਖਾਫੀ ਜਿਹਾ ਰਹੇ ਦਾ ਦੂ ਘੱਟ ਅੰਦਰ ਦੀਵਾਰ। ਨੇ। ਹੂੰ निर्मल पेख अपार ताश बिन अवर ना बिन कोई, कोई हु। निर्मल पेखा अपार ताश बिना वर कोई जे कोई निर्मल पेखा अपार आपा भूल गए हो जे कदे न लपड़े हां जी ਜਿਹੜਾ ਜਿਹਦੇ ਅੰਦਰ ਸ਼ਾਂਤੀ ਹੈ ਸੰਤ ਹੋ ਗਿਆ ਸ਼ਾਂਤ ਹੋ ਗਈ ਆਤਮਾ ਤਾਂ ਭੇਖ ਬਦਲ ਗਿਆ ਉਹਦਾ ਹੂੰ ਹੂੰ ਸੱਤ ਸੰਤ ਹੋ ਕੇ ਸਰਾਇ ਕਿਰੋਇ ਫਿਰ ਉੱਥੇ ਠੀਕ ਹੈ ਜੀ ਸੱਚ ਕਹਿਣਾ ਸੱਚ ਪਹਿਨਣਾ ਉੱਥੇ ਉਹ ਪਰ ਉਹਦਾ ਬਿਨਾਂ ਹੂੰ ਹਾਂ ਉਹਦਾ ਬੇਸ ਜਿਹੜਾ ਬਦਲ ਗਿਆ ਦਰਵੇਸੀ ਕੋਈ ਮਤਲਬ ਨਹੀਂ ਜਿਉਂਦੇ ਨੇ ਆ ਗਿਆ ਹੋਇਆ ਠੀਕ ਹੈ ਜੀ ਆਸਵੇਂ ਨਾਲ ਕੋਈ ਉਹਦੇ ਬਿਨਾਂ ਹੋਰ ਕੋਈ ਪੇਛਦੀ ਹੂੰ ਹਾਂ ਮਨ ਬਚ ਜਿਨ ਜਾਣਿਓ ਤਇਓ ਸੋਈ ਇਹਨੇ ਮਾਨ ਕਰਕੇ ਔਰ ਬਚਤ ਹ ਭਾਇਓ ਮਾਨ ਕਰਕੇ ਵਚਨ ਕਰਕੇ ਹਮ ਕੁਰਬਾਨੀ ਲਿਆ ਤੇ ਮਰ ਕਰਕੇ ਜਾਣ ਲਿਆ ਐਜੀ ਅਵਸਥਾ ਹੁੰਦੀ ਹੈ ਹੂੰ ਜੇ RAMDAS ਦੇ ਬੰਦ ਪਟਾਣੇ ਗੁਰਬਾਣੀ ਸੁਣ ਲਈ ਸਮਝ ਲਈ ਔਰ ਬੋਲ ਕੇ ਕਹਿਤੀ ਹੂੰ ਹੂੰ ਬੋਲ ਕੇ ਕਈ ਬਜਨਾ ਬਜਨ ਮਿਲ ਗਏ ਨਾ ਸਾਲੋਕਿਆ ਹੋ ਗਏ ਹਾਂਜੀ ਫੇਰ ਸਮਝ ਲੋ ਉਹ ਜਾਈ ਹੋ ਗਏ ਹੋ ਹੋ ਗਏ ਉਹਦੇ ਸਮਰ ਹੋ ਗਏ ਹੂੰ ਕਰਕੇ ਬਚਨ ਕਰਕੇ ਜੀ ਨੇ ਸਮਝ ਲਿਆ ਹੂੰ ਵਰਗੇ ਹੋ ਗਏ ਜੈ ਵਚਨ ਸੀ ਨਾ ਜਿਹਦੇ ਬੋਲੇ ਨੇ ਉਹਦੇ ਵਰਗੇ ਹੀ ਦੋ ਉਹ ਜਿਹੇ ਵਚਨ ਯਾਦ ਕਰ ਦਿੰਦੇ ਨੇ ਉਹ ਵਹੀ ਯਾਦ ਨੇ ਉਹੋ ਜਿਹੇ ਨੇ ਹਾਂਜੀ ਤਰਨ ਗगन ਨਵਖੰਡ ਮੈਂ ਜੋਤ ਸਰੂਪੀ ਗਗਨ ਹੂੰ ਗਗਨ ਹੋ ਗਿਆ ਸਾਰਾ ਅਕਾਸ਼ ਜਿੰਨਾ ਅਕਾਸ਼ ਹੈ ਹੂੰ ਪ੍ਰਮ ਗਿਆਨੀ ਕਹੇ ਮਨ ਪ੍ਰਗਾਸ ਜਿਹਾ ਜੇ ਤਾਰੂ ਪਰ ਅਕਾਲ ਸਿਰਦਾ ਤਾਂ ਉੱਥੇ ਹੀ ਰਹੂ ਜਿੱਥੇ ਬੈਠਾ ਹੈ ਉਹਦਾ ਸੈਂਟਰ ਤਾਂ ਉੱਥੇ ਹੀ ਰਹੂ ਜਿੱਥੇ ਬੈਠਾ ਸਰੀਰ ਕਰਕੇ ਸਰੀਰ ਕਰਕੇ ਬੈਠਾ ਸੈਂਟਰ ਤਾਂ ਇੱਥੇ ਰਹੂਗਾ ਅੱਛਾ ਸਾਰਾ ਹੀ ਆ ਗਿਆ ਵੀ ਗਗਨ ਗਗਨ ਆ ਗਿਆ ਤਨੂੰ ਗਗਨ ਨਾਭਖੰਡ ਨਾਭਖੰਡ ਕੀ ਹੈਦਾ ਜੋ ਨਾਭਖੰਡ ਬਣਿਆ ਦਿਰਮਨ ਹਿਰਦੇ ਨੂੰ ਨਾਭਖੰਡ ਕਹਿੰਦੇ ਜਿਹੜਾ ਆਪਣਾ ਗਿਆਨ ਹੈ ਨਾ ਹੂੰ ਹੂੰ ਉਹਦੇ ਵਾਸਤੇ ਨਾਭਖੰਡ ਦੋਵੇਂ ਘੜਨਾ ਹੋਇਆ ਨਾ ਕਿ ਹੋਰ ਹੂੰ ਨੌ ਘੜਨੀਆਂ ਨਾਭਖੰਡ ਹੂੰ ਹਾਂ ਹਾਂ ਭੰਨ ਮਹ ਹਾਂਜੀ ਆਹ ਰੰਗ ਦਾ ਨਾਮ ਹਾ ਜੋਤ ਜੋਤੀ ਸ ਨਹੀਂ ਨਹੀਂ ਪਰ ਥਰ ਥਰ ਇਹ ਨਹੀਂ ਹੈ ਇਹ ਆ ਹੂੰ ਹੂੰ ਤਲਨ ਗਗਨ ਨਭ ਖੰਡ ਖੰਡ ਬਹੁਤ ਹੋ ਜਾਂਦੇ ਇੱਕ ਵਚਨ ਲਈ ਹੈ ਨਹੀਂ ਖੰਡ ਤਾਂ ਆਇਆ ਕਿਉਂਕਿ ਮੈਂ ਆ ਗਿਆ ਅਖਰ ਮੂਰੇ ਹਾਂ ਹੂੰ ਖੰਡ ਸਿੰਗੂਲਰ ਹੀ ਹੈ ਜਦ ਖੰਡ ਮੈਂ ਹੂੰ ਜੋਤ ਸਰੂਪ ਇਹ ਰਹੇ ਹੋ ਪਰ ਹੂੰ ਉਹਦੇ ਜਿਹੜਾ ਹੈ ਹਿੰਦੇ ਵਿੱਚ ਸਾਰੇ ਪ੍ਰਗਟ ਹੈ ਸਰੂਪ ਰਹੇ ਹੋ ਪਰ ਠੀਕ ਹੈ ਜੀ ਗੁਰੂ ਆ ਜੀ ਗੁਰਾਜੰਦ ਦੀ ਗੱਲ ਹੋ ਇਦੇ ਖਾਤਰ ਅਸੀਂ ਇਹ ਵੀ ਅਰਥ ਕਰ ਸਕਦੇ ਹਾਂ ਨਾ ਹੂੰ ਜਿਹੜਾ ਸੰਸਾਰ ਹੈ ਬਹੱਲਾ ਹੂੰ ਚਾਲਨ ਗਗਨ ਅਭੰਡ ਜਿਹੜੇ ਹੈਗੇ ਨੇ ਜੋ ਤਸਰੂਪੀ ਜਿਹੜਾ ਪਰਮੇਸ਼ਰ ਆ ਸਾਰਿਆਂ ਨੂੰ ਰਿਹਾ ਹੈ ਹੂੰ ਪੂਰਾ ਕਰ ਰਿਹਾ ਠੀਕ ਹੈ ਜੀ ਹਾਂ ਠੀਕ ਹੈ ਕੋਈ ਗੜਾ ਹਾਂ ਇਹ ਆਦਮੀ ਨਹੀਂ ਕਰ ਸਕਦਾ ਆ ਗਿਆ ਨਾ ਗਏ ਹਾਂਜੀ ਪਰ ਕੌਣ ਰਿਹਾ ਭਰਪੂਰ ਕੌਣ ਰਿਹਾ ਪਰਮੇਸ਼ਰ ਕਰਦੇ ਸਬਦ ਗੁਰੂ ਰਹਿਓ ਪਰ ਹਾਂ ਹਾਂ ਹਾਂ ਪਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਅੱਛਾ ਪਨ ਮਥਰਾ ਕਹਿੰਦਾ ਜਿਵੇਂ ਉਹ ਸਾਰੇ ਸੰਸਾਰ ਭਰਿਆ ਨਾ ਤਬ ਖੱਡ ਨੂੰ ਹਾਂਜੀ ਤੇ ਕੁਛ ਨਹੀਂ ਗੁਰੂ ਜੀ ਵੀ ਉਹੀ ਕੰਮ ਕਰ ਰਿਹਾ ਆ ਆਦਮੀ ਰੂਪ ਲੈ ਆ ਉਹ ਬੇਸ਼ੱਕ ਸਾਰੇ ਚੀਜ਼ਾਂ ਤੋਂ ਕਰ ਰਿਹਾ ਆਦਮੀ ਆਦਮੀ ਪੂਰਾ ਗਿਆਨ ਕਰਤਾ ਉਹੀ ਕੋਈ ਨਹੀਂ ਗੱਲ ਚ ਪਰ ਕਰਾ ਰਿਹਾ ਚਾਹੇ ਆਦਮੀ ਵਾਸਤੇ ਫੜ ਕੇ ਪੂਰਾ ਪਰਮੇਸ਼ਰ ਜਿਹੜਾ ਕਰਾ ਰਿਹਾ ਹੈ ਭੇਦ ਕੁਝ ਨਹੀਂ ਪਤਾ ਪਰਮੇਸ਼ਰ ਨਾਲ ਹੀ ਕੰਮ ਕਰ ਰਿਹਾ ਹੈ ਹੂੰ ਹੂੰ ਪਰਗਟ ਰੂਪ ਜਿਹੜਾ ਪਰਮੇਸ਼ਰ ਵਾਲਾ ਕੰਮ ਕੀ ਕਰ ਰਿਹਾ ਹੈ ਹਰ ਪ੍ਰਤਖ ਹੋ ਕੇ ਹਰ ਵਾਲਾ ਕੰਮ ਕਰ ਲਿਆ ਹਰ ਗੁਪਤ ਚ ਕਰ ਲਿਆ ਪ੍ਰਤਖ ਹੋ ਕੇ ਕਰ ਲਿਆ ਹੂੰ ਇਹ ਰੁੱਖੀ ਬੋਲੀ ਚ ਬੋਲ ਕੇ ਕਰ ਰਿਹਾ ਉਹ ਉਹ ਸੰਤਰਾਤਮ ਦੀ ਆਵਾਜ਼ ਨਾ ਕਰੇ ਹੋਏ ਗਏ ਕੋਸਰੋ ਮੋਰ ਦੇ ਕਾਲੇ ਵਾਰੋ ਖੋਲ ਕੇ ਕਾਲੇ ਹੂੰ ਤੋਂ ਆਜ ਫਰਕ ਕੋਈ ਨਹੀਂ ਹੈ ਹਾਂਜੀ ਉਹੀ ਗੱਲ ਕਹਿ ਰਹੇ ਆ ਠੀਕ ਹੈ ਜੀ ਕੌਕਾ ਫਾਈਨਲ ਹੈ ਭਰ ਕੇ ਪੂਰਾ ਹੋਣਾ 83 ਲੱਖ ਜੁੰਦੀ ਆਖਰੀ ਪੌੜੀ ਭਰ ਕੇ ਪੂਰਾ ਕਰ ਰਿਹਾ ਠੀਕ ਹੈ ਜੀ ਘਰ ਦਾ ਹੋਲ ਕੇ ਆਖਰੀ फाइनल टच दे रहे हो उस कबू जेड़ा सब परमिशन करदा आया mm -hmm. mm -hmm. है ताननगर नाम खान डी हं फाइनल टच करन दे रे फाइनल टच गुरुवार ਇਹ ਕਿ ਆ ਇਸ ਪੌੜੀ ਦਾ ਆਖਰੀ ਤੌਰ ਤੇ ਹੁਣ ਇਹ ਕਰਾ ਰਹੇ ਆ ਭਗਤ ਕਰਾ ਰਹੇ ਨੇ ਹੂੰ ਉਹ ਆਖਰੀ ਟੱਚ ਦਾ ਰੰਗ ਜਿਹੜਾ ਆਖਰੀ ਚਾਹੁੰਨੋਂ ਨਾ ਹਾਂਜੀ ਉਹ ਇਹ ਨਾਲ ਤੋਂ ਕਰਾ ਰਹੇ ਆ ਅੱਜ ਪਰ ਕੱਖ ਕਰਦਾ ਆਇਆ ਹੂੰ ਇੱਕ ਇਹ ਜਿਹੜਾ ਆ ਮਦਦ ਕਰ ਰਹੇ ਨੇ ਰੱਖਦੇ ਯਾਦ ਕੇ ਬਾਕੀ ਉਹ ਕਰਦਾ ਆਇਆ ਪਿੱਛੇ ਤੇ ਹੂੰ ਜਿਹੜਾ ਕੱਖ ਕਰਦਾ ਆ ਉਹ ਇਹ ਕਰ ਰਹੇ ਪਰ ਦਾਖਰੂਪ ਚ ਇਹ ਕਹਿਣਾ ਚਾਹੁੰਦਾ ਪਟ ਭੇਦ ਨਹੀਂ ਤਾਂ ਹੀ ਕਹਿ ਰਿਹਾ ਨਾ ਇਹ ਗੱਲ 'ਚ ਭੇਦ ਕੋਈ ਨਹੀਂ ਹੈ ਹੂੰ ਹੂੰ ਉਸੇ ਦੀ ਉਸੇ ਦਾ ਕੰਮ ਕਰ ਰਿਹਾ ਹਾਂਜੀ ਬੁਲਾਇਓ ਜਨਮਾ ਫੋਨ ਮਤਲਬ ਬੁਲਾਏ ਬੋਲ ਰਹੇ ਨਹੀਂ ਜਨਮਾ ਤੇ ਤੁਹਾਰੇ ਲਿਖੇ ਹਨ ਹੂੰ ਪਰ ਮੈਂ ਤਾਂ ਨਾ ਜਨਮੂ ਹਾਂਜੀ ਹਾਂਜੀ ਇੱਥੇ ਮਥਰਾਪੱਤ ਦੇ ਸਤ ਸਵਈਏ ਸਮਾਪਤ ਅਗਲਾ ਸੋਈਆ ਕਰਦੇ ਹਾਂ ਜੀ ਜੀ ਅਜੇ ਗੰਗ ਜਲ ਅਤਲ ਸਿੱਖ ਸੰਗਤ ਸਭ ਨਾ ਵਹਿ ਅਜੇ ਗੰਗ ਜਿਗਾ ਲਟਲ ਇਹ ਗੰਗ ਹੈ ਅਜੇ ਗੰਗ ਜਲੇ ਵੀ ਨਹੀਂ ਗੰਗ ਹਿੰਦੂਆਂ ਦਾ ਵਿਸਾਖੀ ਤੇ ਕਿਹਾ ਹੈ ਮੈਨੂੰ ਲੱਗਦਾ ਨਹੀਂ ਹੈ ਗ੍ਰੰਥਾਂ ਚ ਮੈਂ ਤਾਂ ਸੁਣਿਆ ਨਹੀਂ ਇਹ ਆ ਸਕਦਾ ਦੂਜੀ ਤਾਂ ਤਾਂ ਨੇ ਇਹ ਨਾਲ ਹੀ ਤਾਂ ਹਾਂਜੀ ਉਹਦੇ ਨਾਲ ਨਾਲਾ ਘੱਟ ਕੇ ਪਾਣੀ ਦਾ ਰਾਹ ਮੋੜ ਕੇ ਬਹੁਤ ਪਾਣੀ ਪੈਣਾ ਮੈਲੀਓ ਬਹੁਤ ਹੋ ਗਈ ਆਉ ਬੈਲੀ ਵੀ ਹੋ ਗਈ ਤੇ ਇਹ ਆ ਜਾਏਗਾ ਅੰਦਾ ਇਹਨੂੰ ਨਹੀਂ ਕੋਈ ਕੋ ਬੰਨਲ ਵੇ ਨਹੀਂ ਹੋ ਸਕਦਾ ਹੂੰ ਇਹ ਨਹੀਂ ਕਿਦੀ ਰੋਕੀ ਰੁਕਦੀ ਹੈ ਹੂੰ ਹਨ ਜਵੀ ਨੇ ਜਗਾਣ ਚਾਲ ਜਾਈ ਨਿਕਲ ਗਈ ਬਾਅਦ ਜਦੇ ਲ ਵਧਾ ਕੇ ਲੋਕਾਂ ਨੂੰ ਭਲੇਖਾ ਪਾਤਾ ਆਪਣੀ ਮਗਰ ਲਾਗ ਰੇ ਕੁਰਬਾਨੀ ਹਲਾਤੀ ਔਰ ਹੋਰ ਨੇ ਲਿਆਉਣੀ ਕੀ ਸੀ ਬਣਾ ਕੇ ਜੜਾ ਭਲੇਖਾ ਪਾਇਆ ਲੋਕਾਂ ਨੂੰ ਮੇਰੀ ਮਗਰ ਲਗੋ ਠੀਕ ਹੈ ਆ ਰਹੇ ਨੇ ਫਿਰ ਕਹਤਾ ਇੱਕ ਸ਼ਿਵ ਭਾਏ ਇੱਕ ਗਾਇ ਇੱਕ ਫਿਰ ਕਹੇ ਦਾ ਫਿਰ ਰਾਮ ਹੋਰ ਕਸ਼ਨ ਕੇ অবতার ਕ ਜੀ ਜਾਦੂ ਜਨ ਕਾਲੀ ਦੇਵੀ ਉਹਦੀ ਛਾਤੀ ਤੇ ਖੜੀ ਹੈ ਚੰਡੀ ਚੰਡੀ ਵੀ ਇੱਕ ਥੱਲੇ ਦੀ ਹੈ ਦੇਵੀ ਕਾਲੀ अच्छा जी छोटी बुद्धि ओरे ने जवदी का टाया फिर अच्छा सिखाया इना ने आपने दिखाया कलेक्टर uh -huh. uh -huh. ने हम्म हम्म और उदा कमरे दा नी बुद्धि ने टा लिया हम्म हम्म नेता कहियो वाजो के अर के थे अगर नी ये बुद्धि इनु ਠੀਕ ਹੈ ਜੀ ਜਲ ਟਲ ਸਿੱਖ ਸੰਗਤੀ ਸਭ ਨਾਵੇ ਜਲ ਟਲ ਹਾਂ ਆ ਨਿਤ ਪੁਰਾਣ ਬਾਚੀਐ 베ਰ ਬ੍ਰਹਮਾ ਮੁਖ ਗਾਵੇ ਨਿਤ ਪੁਰਾਣ ਬਾਕੀ ਹੈ ਆ ਜਿਹੜੇ ਪੁਰਾਣ ਨੇ ਨਾ ਹਾਂ ਇਹ ਕੇ ਦੇ ਕੀਦਾ ਅਸਲ ਦੇ ਵਿੱਚ ਗੱਲ ਕੀ ਸੀ ਇਹਨਾਂ ਨੇ ਕੀ ਬਣਾਤੀ ਰੋਣ ਆ ਰਾਮ ਨਖਾਲਾ ਪਿਆ ਸੰਕੀ ਰਾਮ ਕੌਣ ਹੁੰਦਾ ਰਾਮ ਤਾਂ ਸਾਰੇ ਘਟਾਜ ਬੋਲਦਾ ਹੂੰ ਇਹਨਾਂ ਦਾ ਦੇਖੋ ਬਣਾਤਾ ਹੋਰ ਇਹ ਕੋ ਬਣਾਤਾ ਇਹ ਹੀ ਬਚਣਾ ਹੁੰਦਾ ਠੀਕ ਹੈ ਇੱਕ ਚੀਜ਼ ਹੁੰਦੀ ਦੀ ਬਾਚੀ ਦੀ ਹੂੰ ਹੂੰ ਬਾਚੀਆ ਠੀਕ ਹੈ ਜਿਹੜੇ ਪੇਪਰ ਦਿੰਦੇ ਨੇ ਉਹ ਪੇਪਰ ਬਾਚੇ ਜਾਂਦੇ ਨੇ ਵਾਜ ਕੇ ਨੰਬਰ ਦਿੱਤੇ ਜਾਂਦੇ ਨੇ ਹੂੰ ਇਹੋ ਤੋਂ ਜੁੜੇ ਨੇ ਸਟੂਡੈਂਟ ਲੋਗ ਹਾਂ ਜੀ ਬਵੇਕ ਬੁੱਧੀ ਆਨ ਵਾਜਦੀ ਹੈ ਹੂੰ ਹੂੰ ਜਮਹਰ ਵਿਸ਼ਾਸਤਰਾ ਨੂੰ ਹੈ ਦੁੱਧੇ ਸਿਮਰਤ ਸਾਸਤਰ ਸਕਲ ਜਾਣਗੇ ਤਾਂ ਬਾਅਦ ਜਾਣਗੇ ਹੂੰ ਹੂੰ ਅਗਿਆ ਦੇ ਕੇ ਲਿਆਉਂਦੇ ਤੇ ਟੀਚਰ ਵਾਜਦਾ ਤਾਂ ਕਹਿੰਦਾ ਗਲਤੀ ਹੈ ਗਲਤੀ ਦੱਸਦਾ ਅੱਜ ਉਹਦਾ ਪੱਲੀ ਬੁੱਧੀ ਵਾਲੇ ਦਾ ਹੂੰ ਹੂੰ ਦੇਖਦੇ ਆਂ ਅਗਰ ਮਤਨ ਦੇਖਿਆ ਕਿਥੋਂ ਗਲਤੀ ਕੀਤੀ ਹੈ ਲੋਕਾਂ ਦੀ ਵਿਦਵਾਨਾਂ ਦੀ ਗਲਤੀਆਂ ਨੂੰ ਕੇ ਸੁਧਾਰੀ ਦਾ ਹੂੰ ਵਿਦਵਾਨ ਛੋਟੀ ਬੁੱਧੀ ਵਾਲੇ ਸੰਸਾਰੀ ਆਦਮੀ ਹੁੰਦੇ ਨੇ ਹੂੰ ਮਾਇਆਦਾਰੀ ਹੁੰਦਾ ਹੂੰ ਭਾਦਰਤਵਾਦੀ ਇਹ ਤੇ ਭਾਦਰਤਵਾਦ ਤੋਂ ਜੇ ਅੱਗੇ ਜਾਂਦਾ ਇਹਨਾਂ ਦੀ ਗਲਤੀ ਬਾਅਦ ਚ ਹੁੰਦੀ ਹੈ ਆਈ ਵਦੂਆੰ ਜੀ ਕੇ ਸਾਡੇ ਰਿਸ਼ੀ ਬੁਰੀ ਇਹਨਾਂ ਨੇ ਜੋ ਗੱਤੀਆਂ ਕੀਤੀਆਂ ਨੇ ਵਾਚੀਆਂ ਨੇ ਪਰਮਾ ਇਸ ਕਰਕੇ ਉਹ ਵਾਚਿਆ ਲੱਗਦਾ ਹੈ ਉਹ ਪੜੇ ਨਹੀਂ ਵਾਚੇ ਨੇ ਪਰ ਤੇ ਅਸਰ ਹੋ ਜਾਂਦਾ ਜਿਹੜਾ ਬਾਛਦਾ ਗੱਲ ਉਹਨੂੰ ਸੱਚ ਮੰਨਦਾ ਨੁਕਸ ਦੇਖਦਾ ਹੂੰ ਹੂੰ ਵਾਚਣ ਵਾਲੇ ਨੇ ਉਹਦਾ ਨੁਕਸ ਦੇਖਣਾ ਹੂੰ ਕੰਨ ਵਾਲਾ ਖੋਜੀ ਹੈ ਹੂੰ ਪਾਗਲ ਵਾਲਾ ਵਿਦਵਾਨ ਹੈ ਹੂੰ ਹੂੰ ਠੀਕ ਹੈ ਜੀ 베ਦ 브્રహ్మా ਦਾ ਮੁਖ ਭਉ ਦਾ ਹੈ 베ਦ ਫਿਰ ਇਹ ਜਿਹੜੇ ਬਾਜਦੇ ਨੇ ਅੱਜ ਕੇ ਗਉਂਦੇ ਨੇ ਉਸ ਲਈ ਬ੍ਰਹਮਾਨੇ ਗੁਰਬਾਣੀ ਨੇ ਬਾਜ ਕੇ ਜਿਹੜੇ ਲਿਖੇ ਨੇ ਗੁਰਬਾਣੀ ਦੀ ਗੱਲਾਂ ਸੋਤੇ ਸਾਸਤਰ ਸਗਲ ਉਹ ਬੇਦ ਹੈ ਬ੍ਰਹਮਾਨੇ ਫਿਰ ਉਹ ਗਿਆਨ ਜਿਹੜਾ ਗਾਇਆ ਉਹ ਵਾਚਿਆ ਹੋਇਆ ਗਿਆਨ ਗੁਰਮਤ ਦਾ ਗਿਆਨ ਵਾਚਿਆ ਹੋਇਆ ਇਹਦੇ ਅੰਤ ਪੜਟ ਤੇ ਵਿਦਵਾਨਾਂ ਨੇ ਇਹਦੇ ਅੰਤ ਪੜਟ ਕੇ ਨਾਲੇ ਫਿਰ ਇਹ ਵਾਕਿਓ ਅਰਥ ਨਹੀਂ ਕੀਤੇ ਹੂੰ ਵਾਕਿਓ ਨੂੰ ਰੱਦ ਕਰਕੇ ਉਹੀ ਬਹਿਤ ਹੂੰ ਹਾਂਜੀ ਅਜੇ ਚਵਰ ਸਿਰ ਢੁੱਲੈ ਨਾਮ ਅੰਮ੍ਰਿਤ ਮੁਖ ਲਿਓ ਹਾਂ ਹੂੰ ਹਾਂਜੀ ਚਵਰ ਸਿਰ ਢੁੱਲੈ ਹੂੰ ਚਵਰ ਬੀਜਿਆ ਚੌਰ ਇੱਟੋ ਲਾ ਸਰ ਤੇ ਸਰ ਤੇ ਟੋ ਲੈ ਜਾਓ ਔਰ ਹੂੰ ਅਮਰੇ ਤੇ ਮੁਖ ਲਿਓ ਹੂੰ ਉਹਨੇ ਬਿਚ ਕੀ ਆ ਹੂੰ ਉਹ ਜਬਰਤਾ ਚੀਜ ਜੀ ਅਜਾ ਜਬਰ ਅਜਾ ਕੀ ਆ ਉਹ ਕਬਰ ਹੂੰ ਹੱਥ ਤੇ ਜਿਹੜਾ ਸਰ ਤੇ ਹੱਥ ਆ ਉਹ ਜਾ ਚਾਬਰ ਹੂੰ ਕਾਲ ਕਲਮ ਹਕੂਮਤ ਕੋ ਕੋਣ ਬੈਠ ਸਕਦਾ ਹੈ ਅਜੇ ਤਾਂ ਇਹ ਬੈਠ ਨਹੀਂ ਸਕਦਾ ਕੋਈ ਜਿਹਦੇ ਤੇ ਦਾ ਹੱਥ ਹੈ ਉਹ ਕੋਈ ਮਤਲਬ ਹੱਥ ਨੂੰ ਪਰੇ ਨਹੀਂ ਹਟਾ ਸਕਦਾ ਜਿਹਦਾ ਪਛਾ ਜਿਹਦੇ ਹੱਥ ਜੇ ਸਰਤੇ ਹੋਵੇ ਉਹ ਨਹੀਂ ਬਹਿਰ ਉਹ ਨੂੰ ਕੋਈ ਪ੍ਰਭਾਵਿਤ ਕਰਕੇ ਪੱਲੇ ਪਾਸੇ ਹਟਾ ਦੇਵੇ ਫਿਰ ਅਜੇ ਦੀ ਰਣ ਮੋਦੀ ਬੇ ਕਿਸੇ ਨੂੰ ਪੁੱਛ ਕੇ ਦੰਦਾ ਨਹੀਂ ਕਿਸੇ ਜੇ ਖੋਦਾ ਤੁਹਾਨੂੰ ਕਿਸੇ ਦੀ ਸਲਾਹ ਲੈਂਦਾ ਜੇ ਕਿਸੇ ਨੂੰ ਦੰਦਾ ਤਾਂ ਵੀ ਸਲਾਹ ਲੈਂਦਾ ਅਜਾ ਹਾਂਜੀ ਹਾਂ ਅਜਾ ਹਾਂ ਕਬਰ ਸਿਰ ਤੋਂ ਲੈ ਨਾਮ ਅਮ੍ਰਿਤ ਲਾ ਹਾਂਜੀ ਅਮਰਦਮੋਖਾ ਜੀ ਦੇ ਨਾਮ ਦੇ ਵਿੱਚ ਜਿਹੜਾ ਅਤ੍ਰੋ ਬਾਣੀ ਦਾ ਪ੍ਰਵਾਹ ਨਿਕਲਦਾ ਇਹ ਸਮਝੋ ਉਹਦੇ ਸਿਰ ਤੇ ਉਹਦਾ ਹੱਥ ਹੈ ਹਾਂ ਹਾਂ ਪਰਮੇਸ਼ਰ ਦਾ ਆਤਮ ਦੀ ਕਿਰਪਾ ਉਹ ਬਲਾਉ ਤਾਂ ਬੋਲਦਾ ਹਾਂ ਹਾਂ ਗੁਰ ਅਰਜਨ ਸਿਰ ਛੱਤਰ ਆਪ ਪਰਮੇਸ਼ਰ ਦਿਓ ਆਹ ਤਾਂ ਸਿੱਧਾ ਹੀ ਆ ਗਿਆ ਇਹਦਾ ਕੀ ਗੱਲ ਬਈ ਪੰਕਤੀ ਦਾ ਬਚਨ ਬਹੁਤ ਔਖਾ ਇਹਤੋਂ ਕੌਣ ਬਚੂਗਾ ਹੂੰ ਉਹ ਰੱਜੰਦੇ ਸਰ ਤੇ ਪਾਤ੍ਰਾ ਪਰਮੇਸ਼ਰ ਨੂੰ ਦਿੱਤਾ ਕਿਉਂਕਿ ਬਾਗਾਲਾ ਨੇ ਤਾਂ ਪਾਣੀ ਗੱਲ ਇਹ ਗੱਲ ਇਹ ਗੁਰੂ ਪਰਮੇਸ਼ਰ ਤੋਂ ਵੱਡਾ ਕੋਈ ਨਹੀਂ ਹੂੰ ਪਰ ਜਿਹਦੇ ਸਰ ਪਰਮੇਸ਼ਰ ਨੇ ਚੋਤਾ ਦਿੱਤਾ ਉਹਨੂੰ ਬੇਸਤੀ ਨਹੀਂ ਕਹਾਂ ਕੀ ਕਹਾਂਗੇ ਹੂੰ ਇਹ ਪੱਤਵੀ ਸਾਰੇ ਪਿਆਕੀ ਨੇ ਆ ਪੱਟਵੀ ਪੱਟਾਂ ਦੇ ਹਲਤੇ ਵੀ ਉਹੀ ਜਦੜ ਇਹ ਵਿਆਖਤੀ ਦੀ ਸੀ ਕੀ ਸੀ ਫਿਰ ਠੀਕ ਹੈ ਜੇ ਕੋਈ ਅਲਾ ਹੋ ਜਵੇ ਜਾਂ ਕੁਝ ਹੋ ਜੇ ਉਹਨੂੰ ਕੀ ਕਰ ਗਿਆ ਦੇਵ ਜੀ ਆਪ ਬਖਸ਼ਿਆ ਹੈ ਹਾਂ ਗੱਲ ਨੇ ਬਹਿਣਗੇ ਬਚੇ ਨਹੀਂ ਸਕਦੇ ਇੱਥੋਂ ਦੇ ਹਾਂ ਇਹ ਵਜਨ ਗਲਤ ਹਰ ਤਾਂ ਪਰਮੇਸ਼ਰ ਨਹੀਂ ਕਰ ਪੈਂ ਹੱਥ ਕਹ ਹੱਦਾਂ ਦਾ ਪਰਮੇਸ਼ਰ ਤਾਂ ਆਪ ਹੋ ਦੀ ਸਕਦੇ ਹੋ ਪਰਮੇਸ਼ਰ ਤਾਂ ਥੱਲੇ ਆ ਹਾਂਜੀ ਥੱਲੇ ਨੇ ਗੁਰੂ ਤਾਂ ਫਿਰ ਪਰਮੇਸ਼ਰ ਹੈ ਹੂੰ ਹੂੰ ਪਰਮੇਸ਼ਰ ਤਾਂ ਗੁਰੂ ਆ ਫਿਰ ਠੀਕ ਹੈ ਜੀ ਹੋ ਹਾਂਜੀ ਮਿਲ ਨਾਨਕ ਅੰਗਦ ਅਮਰ ਗੁਰ ਗੁਰੂ ਰਾਮਦਾਸ ਹਰਪੈ ਗਇਓ ਆ ਦੇਖੋ ਮਿਲ ਨਾਨਕ ਮਿਲ ਨਾਨਕ ਅਮਰ ਗੁਰ ਨਾ ਕੋ ਅਮਰ ਗੁਰ ਬਿਲਕੇ ਕਿਵੇਂ ਆ ਸ਼ਬਦ ਗੁਰੂ ਨਾਲ ਮਿਲ ਕੇ ਹਮ ਹਮ ਵਿਚਾਰ ਧਾਰਾ ਨਾਲ ਮਿਲ ਕੇ ਗੁਰਮਤ ਵਿਚਾਰ ਧਾਰਾ ਨਾਲ ਮਿਲ ਕੇ ਹਮ ਕਿ ਕਹਿੰਦੇ ਹਾਂਜੀ ਹਾਂਜੀ ਗੁਰੂ ਰਾਮਦਾਸ ਹਰ ਪੈ ਗਇਓ ਰਾਮਦਾਸ ਹੂੰ ਗੁਰੂ ਰਾਮਦਾਸ ਨੂੰ ਵੇਰਾਡ ਕਰਤਾ ਹਾਂਜੀ ਉਹ ਬੈਦੀ ਉਹ ਚੌਥਾ ਕਦੇ ਨਹੀਂ ਇਕੱਠਾ ਨਾ ਰੱਖਿਆ ਆ ਵੀਡੀਓ ਨਾ ਠੀਕ ਹੈ ਜੀ ਐ ਵੀਡੀਓ ਥੋੜੀ ਤੇ ਕਾਇਤ ਹੂੰ ਅਜਾ ਫੇਰ ਉਹੀ ਹੈ ਇਹ ਕਿਉਂ ਆ ਹ ਇਹ ਤੈਨੂੰ ਚਾਰ ਜਗ੍ਹਾ ਇਹੀ ਗੱਲ ਕਿਉਂ ਆਈ ਹੈ ਫੇਰ ਸੁਣ ਨੇ ਸਤ ਅੱਡ ਅਵਰਦਾਸ ਦੀ ਸਾਧ ਹੈ ਹੂੰ ਹੈ ਸੱਤ ਇਕੱਠੀ ਹੋਇਆ ਇੱਥੇ ਵੀ ਤੇ ਇਕੱਠੇ ਮੰਨ ਸਾਧਵੀ ਇਕੱਠੀ ਹੈ ਇਹ ਬਾਜ਼ਾਰਤ ਕੀ ਹੈ ਇਹ ਬਾਜ਼ਾਰ ਤੇ ਥੋੜੀ ਪਤਾ ਲੱਗਣਾ ਥੋੜੀ ਪਤਾ ਲੱਗਣਾ ਇਹ ਬਾਜ਼ਾਰ ਤੇ ਖੁੱਲੀ ਆ ਉੱਥੇ ਇਹ ਬਾਜ਼ਾਰਤ ਬਾਜ਼ਾਰ ਤੇ ਰਹਿਣੀ ਸੀ ਠੀਕ ਨਾ ਕੋਈ ਜੀ ਹੂੰ ਉਹਦਾ ਉਹ ਗੱਲ ਹੋ ਗਈ ਕਹਿੰਦਾ ਬਾਗਾ ਤੇਰੀ ਜੜਵਦ ਹੂੰ ਹੂੰ ਹੋਰੇ ਅਜੋ ਕੁਝ ਕੁਝੀ ਹੂੰ ਜਿਹੜਾ ਖੇੜਾ ਫਿਰ ਬਸੇ ਕੀ ਹੂੰ ਹੂੰ ਇਹਦਾ ਕਿਹੜਾ ਉੱਜੜ ਕੇ ਬਸਦਾ ਬਸੇ ਤਾਂ ਕੁਝ ਜਾਏ ਹੂੰ ਹੂੰ ਇਹ ਭਾਵੇਂ ਤਾਂ ਉੱਡ ਜਾ ਜ਼ਾਰ ਜੋ ਉਜੜੂ ਤਾਂ ਹੀ ਬਸੂਗਾ ਨੱਚ ਘਰ ਜਾ ਕੇ ਹੂੰ ਉਜੜ ਖੇੜਾ ਫਿਰ ਬਸ ਨਾਨ ਕਹਿੰਦਾ ਮੋਰ ਖ ਜਾਣੇ ਕੀ ਮੋਰ ਖ ਰੁਕੀ ਪਤਾ ਕੀ ਬੁਝਾਰਤਾ ਨੇ ਹੈ ਹੂੰ ਕੋਈ ਨਹੀਂ ਹੂੰ ਆ ਆਵੇ ਜੋ ਬਗਰ ਜਾਂਦੇ ਜੇਦੀਓ ਜੋ ਜਾਂਦੇ ਉਹਨਾਂ ਵਿਦਵਾਨ ਵਿਦਵਾਨਾਂ ਦੇ ਵੱਲੇ ਕੁਝ ਨਹੀਂ ਹੁੰਦਾ ਠੀਕ ਹਰਬੰਸ ਜਗਤ ਜਸ ਸੰਚਰੋ ਸੋ ਕਵਣ ਕਹੇ ਸਿਰ ਗੁਰੂ ਸ੍ਰੀ ਗੁਰ 모ਯੋ ਆ ਦੇਖੋ ਹਰਬੰਸ ਹਰਬੰਸ ਹਰਬੰਸ ਉਹ ਆ ਮੈਂ ਪੜਦਾ ਹਾਂਜੀ ਜਗਤ ਜਸ ਸੰਚਰੋ ਹਮ ਹਰਬੰਸ ਕਹਿੰਦੇ ਨੇ ਸਰਕਾਰ ਦੇ ਵਿੱਚ ਜਸ ਕਥਾ ਕੀਤਾ ਨੇ ਜਸ ਹਾਂਜੀ ਜਿਹਨੇ ਪਰਮੇਸ਼ਰ ਦਾ ਜਸ ਗਾਇਆ ਉਹਦਾ ਸੰਸਾਰ ਵਿੱਚ ਤਾਂ ਜਸ ਆਪੇ ਕੀਤਾ ਇਹਨੇ ਸੰਸਾਰ ਦੇ ਵੀ ਜਸ ਕੱਟ ਲਿਆ ਹੂੰ ਤਾਂ ਕਵਣ ਕਹੈ ਸ੍ਰੀ ਗੁਰੂ ਹੋਇਆ ਉਹਨੂੰ ਹੋਇਆ ਸ੍ਰੀ ਗੁਰੂ ਨੂੰ ਕੌਣ ਕਹੂਗਾ ਮਰਿਆ ਹੋਇਆ ਹੂੰ ਵਿਦਵਾਨ ਤਾਂ ਫਿਰ ਇਹ ਮੰਨਦੇ ਇੱਕ ਪਾਸੇ ਤਾਂ ਵਿਅਕਤੀ ਨਹੀਂ ਮੰਨਦੇ ਇੱਕ ਪਾਸੇ ਬਰਤਨ ਨੇ ਉਹ ਵਰਖੀਆਂ ਕਿਹਨੀਆਂ ਮਨਾਈ ਨੇ ਫਿਰ ਕਲੰਡਰ ਕੀ ਨਾਂ ਤੇ ਬਣਾਈ ਨੇ ਵਿਅਕਤੀ ਇਹਨਾਂ ਦੇ ਪਹਿਲਾਂ ਬਣਿਆ ਤੁਸੀਂ ਤਾਂ ਵਿਅਕਤੀ ਬੁਣਦੇ ਹੋ ਕਰਮ ਕੀ ਕਰਦੇ ਨੇ ਮੂੰਹ ਤੇ ਕੀ ਬੋਲਦੇ ਨੇ ਕੱਟ ਨਹੀਂ ਕੀਆ ਕਰਨੀ ਕੀ ਹੈ ਹੂੰ ਹੂੰ ਕਰਮੀ ਔਰ ਕਥਨੀ ਚ ਫਰਕ ਹੈ ਵਿਦਵਾਨ ਉਹ ਕਹਿੰਦਾ ਕੌਣ ਕਹੇ ਸਿਰ ਜਿਹੜਾ ਸੀ ਸਿਰ ਗੁਰ ਮੋਇਓ ਸਿਰ ਗੁਰ ਮੋਇਓ ਹਾਂ ਗੁਰੂ ਨੀਆ ਲਖ ਫਿਰ ਵੀ ਗੁਰੇ ਵਰਤਿਆ ਆ ਕਮਣ ਕਹੇ ਗੁਰ ਮੋਇਓ ਉਹਨੂੰ ਕੌਣ ਕਹਿੰਦਾ ਜੋਤੀ ਜੋਤ ਸਮਾਉਣਾ ਲੈ ਲੈ ਨਿਆ ਕਹਿੰਦੇ ਸਿਰ ਵਰਸੀ ਮਨਾਉਂਦੇ ਆ ਉਹ ਕਾਦੀ ਜਾਣਾ ਮਾਪਦਾਰਤ ਮਿਲਿਆ ਮੰਨਦੇ ਆ ਇਹ ਨਹੀਂ ਬੰਦੇ ਹੂੰ ਤੇ ਗੁਰ ਮੇਰਾ ਸੰਗ ਸਦਾ ਹੈ ਨਾਲੇ ਦਾ ਕੀ ਬਣੂਗਾ ਹੂੰ ਕੁੱਛ ਜਵਾਬ ਨਹੀਂ ਨਾ ਕੋਲ ਪੜਨਦ ਨੇ ਹੂੰ ਹਾਂ ਸੰਪਰਦਾਇਕ 9042 ਇਹ ਖਾਲੂ ਨੇ ਅਗਿਆਨੀ ਨੇ ਰਜਿਸਟਰ ਨੇ ਮੂਰਖ ਨੇ ਹੂੰ ਹੂੰ ਤੋੜ ਲਈ ਸਾਰੇ ਇਹਨਾਂ ਨੂੰ ਕਟੜਵਾਦ ਨੂੰ ਅਗਿਆਨ ਹੀ ਦਰ ਗਿਆਨ ਨਹੀਂ ਹੈ ਗਿਆਨ ਨਹੀਂ ਕੋਈ ਗੱਲ ਨਹੀਂ ਹੂੰ ਹੂੰ ਜੀ ਐਤਸ ਦੀ ਅਗਲਾ ਹੁਣ ਆਖਰੀ ਸਵਈਆ ਹੈਗਾ ਜੀ ਹਾਂ ਦੇਵਪੁਰੀ ਮੈਂ ਗयो ਆਪ ਪਰਮੇਸ਼ਰ ਭਾਇਓ ਆ ਇਹ ਜਿਹੜੇ ਸੀ ਗੁਰਦੇਵ ਸਾਹਿਬ ਹੂੰ ਉੱਥੇ ਬਾਦਸ਼ਾਹ ਤੱਕ ਹੂੰ ਉਹਨਾਂ ਦੀ ਇਕੱਠੀ ਕਰਦਾ ਹੈ ਹੂੰ ਕਿ ਦੇਹਪੁਰੀ ਵੀ ਚਲੇ ਗਏ ਜੇ ਕੋਈ ਆਪਣਾ ਛੱਡ ਕੇ ਦੇਸ਼ ਹੂੰ ਅਮਰੀਕਾ ਜਾ ਕੇ ਬਸ ਗਿਆ ਫਿਰ ਉਹਦੀ ਵਰਦੀ ਬਣਾਉਣ ਲੱਗ ਜਾਂਗੇ ਉਦੋਂ ਦੇ ਹੂੰ ਬਦਲੀ ਹੈ ਉਹਨਾਂ ਨੇ ਮਨ ਨਾਲ ਦੂਜੀ ਵਰ੍ਹੇ ਬਣਾਉਣ ਲੱਗ ਜਓ ਐਨੇ ਐਨੇ ਮਾਇਆ ਦਾ ਰੀਨ ਮਾਇਆ ਦੇਖ ਨਹੀਂ ਸਕਦੇ ਇਹ ਸਰੀਰ ਦੇ ਬੰਦੇ ਨੇ ਨੂੰ ਆਤਮਾ ਜਿਹੜਾ ਉਹ ਨਹੀਂ ਮੰਨ ਸਕਦਾ ਇਹ ਗੱਲ ਆਤਮ ਹੈ ਬੱਟ ਜਿਹੜਾ ਬੋਲ ਰਿਹਾ ਇਹ ਬੱਟ ਨੇ ਮਾਇਆ ਦਾ ਰੀਨ ਮੂਰਤੀ ਪੂਜਕ ਨੇ ਇਹ ਮੂਰਤੀ ਪੂਜਕ ਨੇ ਸਾਰੇ ਜਿਹੜੇ ਗੱਲਾਂ ਕਰਦੇ ਨੇ ਦੇਵਪੁਰੀ ਮੈਂ ਗਿਓ ਆਪ ਪਰਮੇਸ਼ਰ ਪਾਇਓ ਪਰਮੇਸ਼ਰ ਦੀ ਇੱਛਾ ਹੋਈ ਬੁਲਾਇਆ ਸਾਰੇ ਦੇਵਪੁਰੀ ਚਲੇ ਗਏ ਹਮਮ ਅਚੇ ਕੋਈ ਜਾਣ ਜਾ ਕੇ ਰਹਿਣ ਲੱਗ ਜਾਣ ਹਮ ਕਹਿਦਾ ਮੰਗਦਾ ਉਹ ਜੋ ਦੇ ਤੇ ਕਿਹਦੇ ਭਲੇ ਤੁਸੀਂ ਉਹਨਾਂ ਦੀ ਵਰਤੇ ਬਣਾਈ ਜਾਓ ਹਮਮ ਬੁੱਧੀ ਪੁਚੇਰ ਫੇਰਾ ਠੀਕ ਹੈ ਜੀ ਕਿ ਉਹ ਬਸ ਮਾਰੀ ਹੋਈ ਹੈ ਜਿਹੜੇ ਵਰਖੀਆਂ ਬਣਾਉਂਦੇ ਉਹਦੀ ਮਾਰੀ ਹੋਈ ਹੈ ਬਿਲਕੁਲ ਠੀਕ ਹੈ ਜੀ ਕੀ ਕਹਿ ਰਹੇ ਆ ਪਟਕੀ ਕਹਿ ਰਹੇ ਹੂੰ ਹੂੰ ਉਹਦਾ ਤਾਂ ਦੇਪੁਰੀ ਇਹ ਤਾਂ ਪਰਮੈਸ਼ਨ ਵੀ ਮਰ ਗਿਆ ਨਾ ਉਹਦਾ ਹਾਂ ਜੀ ਵੀ ਮਰ ਗਿਆ ਠੀਕ ਹੈ ਜੀ ਹਾਂਜੀ ਇਹ ਸ੍ਰੀ ਦੇਖਦੇ ਨੇ ਮਾਇਆ ਦੇਖਦੇ ਨੇ ਜਿਵੇਂ ਮਾਇਆ ਦੀ ਕੁਝ ਹੂੰ ਆਪਣਾ ਨਹੀਂ ਪਤਾ ਵੀ ਅਸੀਂ ਕਿੱਥੇ ਖੜੇ ਆ ਸਾਨੂੰ ਕਿੱਥੇ ਜੋੜਿਆ ਸੀ ਗੁਰੂ ਨੇ ਅਸੀਂ ਖੜੇ ਕਿੱਥੇ ਆ ਹੂੰ ਇਹ ਤਾਂ ਤੋਂ ਬਚ ਕੇ ਬਚਦਾ ਹੂੰ ਹਾਂਜੀ ਹਰ ਸਿੰਘ ਆਸਨ ਤਹਿ ਬਿਠਾਇਓ ਸਾਰੇ ਸਦਾ ਸਤਿਰਦੀਓ ਅਗਨਾਸ਼ੀ ਰਾਜ ਦਾ ਸਨਸਨ ਦਿੱਤਾ ਸਾਰਿਆਂ ਨੂੰ ਹਮ ਪਰ ਇਹਨੇ ਸਾਰਿਆਂ ਨੂੰ ਸਨਸਨ ਦਿੱਤਾ ਸਨਸਨ ਤੇ ਬੈਠੇ ਰਹੇ ਆਪ ਬਿਠਾ ਨੇ ਉਹਨਾਂ ਨੇ ਬੈਠੋ ਭਾਈ ਆ ਤੁਹਾਡੀ ਸੀਟ ਖਾਲੀ ਕੋਈ ਹੈ ਉਹ ਦੇ ਅਸੀਂ ਤਾਂ ਕਿ ਇੱਕ ਦੇ ਤੇ ਬਹਿ ਗਏ ਸਾਰੇ ਹਾਂ ਆਪ ਬਿਠਾਓ ਆ ਸਿਰ ਗੁਰ ਤਾਂ ਬਿਠਾਇਓ ਸਿਰੀ ਗੁਰ ਤਾਂ ਬਿਠਾਇਆ ਹੈ ਤਾ ਸਿਰ ਗੁਰ ਨੂੰ ਉੱਥੇ ਬਿਠਾ ਲਿਆ ਉਹ ਜਗਾ ਸਿਰ ਗੁਰ ਨੂੰ ਉੱਥੇ ਉਹ ਜਗਾ ਅਸਲ ਸੁਪਨੇ ਤੇ ਆ ਤੇ ਸੁਪਨਾ ਖਤਮ ਹੋਇਆ ਅਸਲ ਬੈਠਾ ਹੀ ਸੀ ਹੀ ਬਦਲੀ ਆ ਜਾਗ ਗਿਆ ਜੋ ਦੇ ਤੇ ਉਹ ਸੇਜੇ ਸਤਲੁਈਆਂ ਨਾਲ ਦੇਖਦੇ ਨੇ ਹੂੰ ਹੂੰ ਤਰੀਂ ਕਹਤਾ ਸੁਹਾਸਣੇ ਠੀਕ ਹੈ ਜੀ ਕੀ ਹਾਸਾ ਹੁੰਦਾ ਸੀ ਆ ਤੁਸ ਸਿੰਘਾ ਜਨਾ ਕੋਲ ਬੋਲ ਰਿਹਾ ਠੀਕ ਹੈ ਜੀ ਹਾਂ ਜੀ ਰਹਿਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੱਪਿਆ ਜਪ ਹੈ ਜੰਪ ਹੈ ਹਾਂਜੀ ਰਹਿਸ ਕੀਓੁਰਦੇਵ ਸੁਰਦੇਵ ਹਾਂ ਰਹਿਸ ਕੀਓ ਸੁਰਦੇਵ ਤੋਂ ਹੈ ਚਾ ਜਾ ਜਾ ਹੰਪਾਂ ਜਿਹੜੇ ਸੁਰਦੇਵ ਨੇ ਨਾ ਸੁਰ ਜਿਹੜੇ ਸੀ ਹੂੰ ਕੋਰ ਸਿੱਖ ਸੀ ਹੂੰ ਰਹਿਸ ਹੋ ਗਿਆ ਯਾਦ ਤੁਚ ਨਾ ਅੱਜ ਕਿਹਾ ਯਾਦ ਕਿਹਾ ਹਰਉ ਅਮਰਦਾਸ ਨੇ ਵੀ ਮੇਰੇ ਪਿੱਛੇ ਮੱਤ ਕੋਈ ਰੋਪੀ ਤੁਮੇ ਮੂਲ ਨਾ ਪਾਇਆ ਹਮ ਇਹ ਕਵੀਰ ਨੇ ਕਿਹਾ ਹੰਤ ਮਰੇ ਜਿਉ ਰੋਈਏ ਜੋ ਆਪਣੀ ਗਰਹ ਜਾਏ ਹਮ ਰਹਿਤ ਹੋ ਗਿਆ ਹਮ ਹਮ ਤੇ ਕੰਮ ਰਹਿਤ ਹੋ ਗਿਆ ਗੱਲ ਤਾਂ ਹੋ ਗਈ ਦੀ ਪਤਾ ਤਾਂ ਲੱਗੂ ਉਸ ਜਾ ਕੀ ਵਾਲੀ ਗੱਲ ਜਿਹੜੇ ਅਸਲੀ ਸਖਲੇ ਉਹ ਇਹ ਰਹਿਸਤਾ ਹੀ ਹੋ ਸਕਦਾ ਹੈ ਹਮਮ ਠੀਕ ਹੈ ਜੀ ਸੰਕਾ ਨਹੀਂ ਕਰ ਸਕਦੇ ਇਸ ਗੱਲ ਹਮਮ ਤੋਹੇ ਜਸ ਜੈ ਜੈ ਜੰਪੈ ਰਹਿਸਤਾ ਹੋਦਰਦਾ ਭਈ ਭਾਈ ਭੇਜਾ ਜ ਉਹਨਾਂ ਨੂੰ ਖੁੱਲਿਆ ਨਹੀਂ ਪਰ ਸੰਕਾ ਨਹੀਂ ਕਰ ਸਕਦੇ ਇਹ ਵੀ ਕਹਿ ਸਕਦੇ ਜਿਉ ਨਹੀਂ ਸਕਦਾ ਇਹ ਵਸਾ ਹੋ ਨਹੀਂ ਸਕਦੀ ਆ ਸਤਿਗੁਰ ਹੈ ਜੀ ਉਹ ਤੇ ਸੱਚਾ ਸਾਡੇ ਬੈਠੇ ਠੀਕ ਹੈ ਜੀ ਇਹ ਕੱਲ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ ਠੀਕ ਹੈ ਜੀ ਇਹ ਡਨਾਈ ਕੀਤਾ ਜਾ ਸਕਦਾ ਇਹਦੀ ਬਣਾਈ ਜਾ ਸਕਦੀ ਲੋੜ ਸੀ ਠੀਕ ਹੈ ਜੀ ਉਹਨਾਂ ਵੀ ਕਹ ਸੀ ਉਹ ਪਹਿਲਾਂ ਸੀ ਉਹਦੇ ਹਾਂ ਖਬਰੀ ਬਣੋਦਾ ਰਿਹਾ ਪਹਿਲਾਂ ਇਹ ਤਾਂ ਹੁਣ ਸ਼ੁਰੂ ਕੀਤੀ ਉਹਨੇ ਕੀ ਦੀ ਬਣਦਾ ਹੂੰ ਇੰਦਾ ਆ ਹਾਂਜੀ ਤੋ ਜੈ ਜੈ ਜੈ ਜੰਪੈ ਜੈ ਜੈ ਜੈ ਜੰਪੈ ਹੂੰ ਉਹ ਜੈ ਜੈ ਦਾ ਜਾਸਾ ਜਿਹੜਾ ਉਹ ਤਾਂ ਕਰਦੇ ਸੀ ਜਪਦੇ ਸੀ ਕਿਆ ਜਾਇ ਜਾਸ ਹੈ ਇਹ ਜਿਹੜੀ ਗੁਰਬਾਨੀ ਹੈ ਨਾ ਇਹਦੇ ਨਾਲ ਜਿੱਤ ਪ੍ਰਾਪਤ ਹੁੰਦੀ ਹੈ ਠੀਕ ਹੈ ਜੀ ਜਾਇ ਉਹ ਜਾਇ ਜਾਤ ਮੈਂ ਹੂੰ ਹੈ ਜਿੱਤਿਆ ਇਹ ਜਿਹੜਾ ਜਾਸਾ ਗੁਰਬਾਨੀ ਹੈ ਕਿਆ ਜਾਇ ਜਪੋ ਜਗਦੀਸ਼ ਜਗਦੀਸ਼ ਹੀ ਕਿਆ ਜਾਇ ਕਰ ਹੈ ਜਗਦੀਸ਼ ਦੀ ਚਾਇਆ ਕਰ ਹੈ ਹੈ ਇਹ ਨੂੰ ਜਾਨੂੰ ਲੈ ਸਮਝਣਾ ਹੈ ਹਾਂਜੀ ਜਿਹੜਾ ਜਪ ਲੈਂਦਾ ਉਹ ਜਗਦੀਸ਼ ਹੋ ਜਾਂਦਾ ਉਹ ਵੀ ਠੀਕ ਹੈ ਜੀ ਆਹ ਸਾਰੀ ਬਾਲੇ ਵਿੱਚ ਗਏ ਤੇ ਭਾਗ ਪਾਪ ਤਿੰਨ ਭੀਤਰ ਕੰਪੈਂ ਆਹ ਅੰਦਰੋਂ ਔਗਣ ਭੱਜ ਜਾਂਦੇ ਨੇ ਅਸੁਰ ਲੱਭ ਹਾਂਜੀ ਉਹ ਜੰਦੀ ਦੀ ਬਾਹਰ ਵਾਲੇ ਆ ਗਏ ਜਾਂਦੀ ਜੇ ਆ ਗਏ ਇੱਥੇ ਨੇ ਚੱਕ ਕੇ ਬੈਗ ਤੇ ਆ ਕੇ ਜੋ ਕੁਛ ਆਇਆ ਸੀ ਆਖਰ ਦੇ ਵਿੱਚ ਇਹ ਚੱਕ ਕੇ ਨਾਲ ਜੋੜਿਆ ਤੂੰ ਆਖਰਾਂ ਫਿਰ ਹੀ ਠੀਕ ਹੈ ਸੀ ਭੱਜ ਗਈ ਅੰਦਰ ਵਕਾਰ ਭੱਜ ਗਏ ਅੰਦਰ ਆਪਦੇ ਨੇ ਪੀ ਆਪਦੇ ਪੀ ਨਾ ਜਿਹੜੇ ਕਰਦੇ ਆਏ ਨੇ ਨਾ ਨੂੰ ਉਲਟੇ ਦਾ ਜਿਹੜੇ ਆਇਆ ਹੂੰ ਹੂੰ ਗਿਆਨ ਖਲ ਖਾਉਂਦੇ ਨਾ ਵਾਹ ਉਹ ਕੱਬਰ ਲੱਗ ਜਾਂਦੀ ਤੇ ਹੂੰ ਤੁਝਾਂ ਨੂੰ ਖੁਸ਼ੀ ਹੋਈ ਹੈ ਕਿ ਕੈਸੇ ਨੇ ਜਿਹਨਾਂ ਨੂੰ ਖੁਸ਼ੀ ਹੋਊਗੀ ਜਿਹਨਾਂ ਦੇ ਪਾਪ ਕੱਬਰ ਕੇ ਪਾਪ ਕਰਦੇ ਰਹੇ ਨੇ ਨਾ ਹੋ ਪਾਪਾਂ ਦੀ ਹੁਲ ਵੀ ਹੈ। ਯਾਕਲ ਉਹ ਹੀ ਨਹੀਂ ਜੇ ਅੰਦਰ ਹੁਲ ਵੀ ਪਾਪ ਹੈ। ਉਹ ਪਾਪਾਂ ਦਾ ਕੰਮ ਆ ਹੀ ਹੈ ਉਹਨੂੰ ਲੱਗਿਆ ਆ। ਠੀਕ ਹੈ ਜੀ। ਪਾਪ ਕੰਮ। ਆਪ ਕੀਤੇ ਨਾ ਹੁਣ। ਹੂੰ। ਪਾਪ ਕੰਭ ਜਾਂਦੇ। ਸੋ ਪਾਪ ਤਿੰਨ ਨਰੋਂ ਕੇ। ਹਾਂਜੀ ਸਾਤੇ ਸੋ ਪਾਪ ਤਿੰਨ ਨਰੋਂ ਕੇ ਗੁਰੂ ਰਾਮਦਾਸ ਜਿਨ ਪਾਇਓ ਆ ਉਹ ਜਿਹੜੇ ਕਿਸੇ ਦੇ ਪਾਪ ਦਾ ਕੰਮ ਦੇ ਰਹੇ ਰਹਿੰਦੇ ਨੇ ਕਿਤੇ ਭੱਟੇ ਵੀ ਜਾਂਦੇ ਨਹੀਂ ਹੂੰ ਹੂੰ ਕਿਸੇ ਦੇ ਅੰਦਰੋਂ ਖਤ ਪਹੁੰਚ ਜਾਂਦਾ ਕਿਸੇ ਦੇ ਅੰਦਰ ਕੰਮ ਦੇ ਨਹੀਂ ਦੇ ਆਪ ਦੇ ਉਹ ਗੁਰਮੁਖ ਦਾ ਬਰੋਧ ਕਰਦੇ ਨੇ ਅੰਦਰ ਪਾਪ ਕੱਭਦੇ ਨਹੀਂ ਉਹ ਗੁਰਮੁਖ ਦਾ ਬਰੋਧ ਹੋ ਜਾਂਦਾ ਏ ਇਹਾਂ ਦੇ ਕੱਟੇ ਜਾਂਦੇ ਨੇ ਆ ਪਰੰਦੇ ਤੁਹਾਡੀ ਹੋ ਜਾਂਦੀ ਹੁੰਦੀ ਹੂੰ ਕੱਟੇ ਸੁਪਾਪ ਤਿੰਨ ਨਰ ਹੋ ਕੇ ਉਹਨਾਂ ਦੇ ਪਾਪ ਕਿ ਇਹ ਉਸ ਹੁਣ ਆਪਣੇ ਘਰ ਦੀ ਗੱਲ ਕਰ ਰਹੇ ਸਾਡੇ ਬਾਪ ਕਿਉਂ ਕੱਟੇ ਗਏ ਉਹਨਾਂ ਦੇ ਕਿਉਂ ਕਬ ਦੇ ਦੇ ਨੇ ਕਾਸ਼ੀ ਵਾਲੇ ਖੜੇ ਨੇ ਉਹ ਥਲੇ ਦੇ ਉਹਦੇ ਵਿੱਚ ਗਿਆਦੀ ਨੇ ਬਰਾਵੜ ਨੇ ਇੱਕ ਵਿਦਵਾਨ ਨੇ ਹਮਮ ਤੇ ਯਾਸਰ ਵਾਲੇ ਦੇ ਉਹ ਰੋਜ਼ ਕਲਦੇ ਨੇ ਹਮ ਉਹ ਕਹਿੰਦਾ ਉਹਨਾਂ ਦੇ ਪਾਪ ਕੱਟੇ ਗਏ ਇਹ ਤੇ ਡਰੋ ਕੇ ਗੁਰੂ ਰਾਮ ਦਾ ਗੁਰ ਕਿਨ ਪਾਇਓ ਕਿਨ ਜਨ ਪਾਇਓ ਨੂੰ ਓਕੜ ਗੁਰੂ ਵੀ ਰਾਮ ਬਚਾਲੇ ਬੁਕਤਾ ਹਮ ਜਿਹਨੇ ਰਾਮ ਦਾ ਗੁਰ ਜਿਹੜੇ ਦਾਸ ਨੇ ਹੂੰ ਗੁਰ ਰਾਮ ਪਾਲਿਆ ਹੂੰ ਜਿਹਨੇ ਦਾਸ ਨੇ ਹੂੰ ਰਾਮ ਪਾਲਿਆ ਰਾਮ ਰਾਮ ਨੂੰ ਗੁਰ ਬਣਾਇਆ ਅੰਦਰ ਆਪਣੇ ਸਦਾ ਦਾ ਰਾਮ ਬੋਲੇ ਜਿਹੜੇ ਅੰਤਰਾ ਆਤਮਾ ਦੀ ਆਵਾਜ਼ ਨਾਲ ਚੱਲੇ ਨੇ ਨਾ ਉਹ ਪਾਲੀ ਉਹਨਾਂ ਨੇ ਉਹਨਾਂ ਦੇ ਪਾਪ ਕੱਟੇ ਜਿਹੜੇ RAM ਦੀ ਆਵਾਜ਼ ਨਾਲ ਅੰਤਰਾਧਮ ਦੀ ਆਵਾਜ਼ ਨਾਲ ਜੁੜ ਨੇ ਉਹ ਆਵਾਜ਼ ਜਿਹਨੂੰ ਸੁਣ ਗਈ ਤੇ ਅੰਤਰਾਧਮ ਦੀ ਆਵਾਜ਼ ਅਰੋਧ ਨਾਲ ਜੁੜ ਗਏ ਉਹਨਾਂ ਦੇ ਪਾਪ ਕੱਟੇ ਜਾਂਦੇ ਨੇ ਦੀ ਆਵਾਜ਼ ਨਹੀਂ ਸੁਣਦੇ ਉਹ ਗੁਰਬਾਣੀ ਦਾ ਵਿਰੋਧ ਕਰਦੇ ਨੇ ਗੁਰਬਾਣੀ ਦਾ ਵਿਰੋਧ ਉਹ ਲੋਕ ਕਰਦੇ ਨੇ ਜਿਹੜੇ ਆਪਣੀ ਅੰਤਰਾਧਵਾਣਾ ਨਹੀਂ ਜੁੜੇ ਹੋਏ ਠੀਕ ਹੈ ਜੀ ਅੰਤਰਾਧਮ ਨਹੀਂ ਅੰਤਰਾਧਮ ਵਿਰੋਧ ਸਕਦੀ ਤੁਹਾਨੂੰ ਗੁਰਬਾਣੀ ਦਾ ਹਾਂ ਗੁਰਬਾਨੀ ਦਾ ਵਿਰੋਧ ਕੌਣ ਕਰੂਗਾ ਸਰਕਾਰ ਕਰੂਗਾ ਹਾਂਜੀ ਸਰਕਾਰ ਵਿਰੋਧ ਕਰੂ 76 ਸਿੰਘਾ ਅਸਨ ਦੀ ਹਾਂਜੀ ਅਰਜਨ ਕੋ ਦੇ ਆਇਓ 76 ਸਿੰਘਾ ਪ੍ਰਥਮੀ ਪ੍ਰਥਮੀ ਦਾ 76 ਜਿਹੜਾ ਸਿੰਘਾ ਅਸਨ ਅਡੋਲਤਾ ਅੰਦਰ ਭੈਤਾ ਦਾ ਜਿਹੜਾ ਆਹ ਸੱਚੀ ਦੂ ਹੂੰ ਸੱਚੀ ਹੋ ਕੇ ਬੋਲ ਰਿਹਾ ਦੀ ਉਧਰ ਪਰਮੇਸ਼ਰ ਦਾ ਹੱਥ ਉਧਰ ਹੋ ਗਿਆ ਤੇ ਉਧਰ ਆ ਗਈ ਉਹ ਅਰਜਨ ਨੂੰ ਕੋ ਦੇ ਆਏ ਉਹਦੀ ਜ਼ਿੰਮੇਵਾਰੀ ਕੋ ਸੰਭਾਲ ਰੇ। ਪిల్లా ਉਹਦਾ ਬਈ ਇਹ ਜ਼ਿੰਮੇਵਾਰੀ ਹੁਣ ਤੇਰੀ ਏ ਭਾਈ। ਹੂੰ। ਇਹ ਗੁਰਮਤਿ ਦੀ ਜ਼ਿੰਮੇਵਾਰੀ ਅਰਜਨ ਨੂੰ ਦੇ ਬੜੇ ਗੁੱਡਿਆ ਨੂੰ ਨਹੀਂ ਦਿੱਤੀ। ਠੀਕ ਏ ਜੀ। ਕਹਿੰਦਾ ਪਰਮੇਸ਼ਰ ਨੇ ਆਪ ਨਹੀਂ ਦਿੱਤਾ ਸੀ ਉਹਨੂੰ। ਹੂੰ ਹੂੰ। ਸਿਰਦਾ ਪਰਮੇਸ਼ਰ ਨੇ ਅਰਜਨ ਨੂੰ ਦਿੱਤਾ। ਇਹ ਰਿਆਈ ਤੇ ਮੈਂ ਦੇ ਜਾਣੂ ਜਿਹਦੇ ਹੱਥੇ ਛਤਰ ਪਰਮੇਸ਼ਰ ਦਾ ਉਸੇ ਨੂੰ ਦੇਣੀ ਸੀ ਹੂੰ ਹੂੰ ਜੇ ਦੂਏ ਨੂੰ ਹੁੰਦਾ ਜਿਹੜਾ ਕੋ ਸੀਗਾ ਉਹਨੂੰ ਦੇ ਤੇ ਹੁਣ ਨੂੰ ਪਤਾ ਸੀ ਪਰਮੇਸ਼ਰ ਨੇ ਤਾਂ ਤਾਂ ਉਹ ਛਤਰ ਇਸ ਕਰਕੇ ਉਹਨੂੰ ਜੁਬਾਰੀ ਦਿੱਤੀ ਜਿਹਦੇ ਤੇ ਛਤਨ ਸੀ ਠੀਕ ਹੈ ਕੁਰਾਰ ਖਤਿਆਇਓ ਠੀਕ ਹੈ ਜੀ ਇਹ ਇੱਥੇ ਸਮਾਪਤੀ ਹੈ ਜੀ 122 ਹੋਇਆ ਟੋਟਲ ਹੋ ਗਿਆ ਹੂੰ